ਇਹ ਲੋਕ ਮਹੱਲਾ ਪੰਜਵਾਂ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਕੰਠ ਦੇਹ ਵਿਛੋੜਾ ਧਣੀ ਸਿਉ ਨਾਨਕ ਸਹਿ ਸੈ ਗੰਠ ਉਹ ਇਹੜਾ ਖਖੜੀਆਂ ਵੀ ਕਹਣਾ ਚੰਗੀਆਂ ਅਗੜੀਆਂ ਨੇ ਜਿਹਦੇ ਜਿਹੜਾ ਤਨ ਲੱਗਿਆ ਵੀ ਉਹ ਸੋਹਣੀਆਂ ਲੱਗਦੀਆਂ ਨੇ ਅੱੱਖ ਕੜੀ ਕੋਈ ਪੈਰ ਰੱਖ ਦੂ ਕੋਈ ਹੋ ਕੇ ਥੱਲੇ ਆ ਜੂ ਵजूद ਹੈ ਖਤੂ ਵजूद ਅਸਾ ਜਿਹੜਾ ਫੋਟੋ ਵੀ ਬਗਾਵ ਦੇਂਦੇ ਲੋਗ ਇਹਦੀ ਆਪਣੇ ਮੂਲ ਨਾਲ ਵਿਚੜ ਕੇ ਬੋੜੋ ਵਿਗੜਦੀ ਜਾਂਦਾ ਹੈ ਖੰਗੜੀਆਂ ਉਹਨਾਂ ਦੇ ਦੇ ਕੱਟਣ ਲੱਗੀ ਜਾਂਦੀ ਹੈ। ਉਹ? ਕਾਹੇ ਚਿੱਤ ਵਿੱਚ ਮੁਕਤ ਹੈ ਪਰ ਉਹਦੇ ਨਾਲ ਵੰਦੂ ਬਾਰੇ ਰਹਿਣਾ ਚਾਹੀਦਾ ਹੈ ਕਹਿਣ ਦਾ ਮਤਲਬ ਹੈ। ਜਾਇ ਤੜਤਲ ਹੈ ਉਹ ਵੀ ਕੋੜਾ ਹੈ। ਤੜਤਲ ਉਹਦੇ ਵਿੱਚ ਵੀ ਹੈ। ਠੀਕ ਹੈ ਪਰ ਤੇਰੇ ਖਾਤਰ ਤਾਂ ਤੜਤਲ ਹੈ। ਬੰਦਾ ਖਾਤਰ ਵੰਦੂ ਦਾ ਵਜੂਦ ਉਹ ਚੋਂ ਹੈ। ਬੰਦਾ ਦਾ ਸਰੀਰ ਹੈ ਉਹਦੀ ਤੜਤਲ ਚੋਂ ਆ। ਤੇਰੇ ਖਾਤਰ ਤਾਂ ਨਹੀਂ ਤੜਤਲ ਨੂੰ ਕਹਾਤਰੂ। ਕੌਂ ਕਿਉਂ ਛੱਡਿਆ ਆਪਣੀ ਮੂਰ ਨੂੰ। ਇਰ ਹੈ ਵਿਛੋੜਾ ਧਣੀ ਸਿਓ ਨਾਨਕ ਸਹਿ ਸੈ ਗੰਠ ਮੈਂ ਜਿਹੜਾ ਤਲੀ ਦਾ ਵਿਛੋੜਾ ਭਰਤ ਕਹਿੰਦੇ ਫਿਰਾਂ ਵਿਛੋੜਾ ਜਿਹੜਾ ਦਾ ਪੈ ਗਿਆ ਪੈਦੀਆਂ ਨੇ ਤਾਂ ਵੀ ਵਿਰਾ ਵਿਛੋੜਾ ਉਹ ਗੱਲ ਨਹੀਂ ਹੁੰਦੀ ਨਾਲ ਜੁੜੀ ਹੋਈ ਲੱਗੂਗੀ ਰੱਖਦੀ ਹੁਣ ਉਧਰੋਂ ਰੱਖਦੇ ਕੇ ਜੋੜਤਾ ਦਮ ਦਾ ਲੇ ਲਾਂ ਦਵਾਰ ਮਹੱਲਾ 5ਵਾਂ ਵੀ ਸਾਰੇ ਦੇ ਮਰ ਗਏ ਮਰ ਬੇਨਾ ਸਕੈ ਮੂਲ ਵਿਮਕ ਹੋਏ ਰਾਮ ਤੇ ਜਿਉ ਤਸਕਰ ਉਪਰ ਸੂਲ ਮਜਲੇ ਬਸਰ ਗਏ ਨਾ ਆਪਣੇ ਮੋਲ ਨੂੰ ਵਰਤਾਉ ਵੀ ਗਏ ਸਰੀਰ ਤੋ ਛੱਡ ਗਏ ਪਰ ਅਸਲ ਜਿਮਾਰੇ ਦੀਵਰ ਅਸਲੀ ਭਰਨਾ ਦੀਵਰੇ ਜੇ ਕਹਦੇ ਅਸਲੀ ਮੌਤੇ ਮਰ ਜਾਂਦੇ ਤਾਂ ਦੁਬਾਰਾ ਬਣਾਈ ਨਹੀਂ ਦਿੰਦੇ ਅਰਦਾਵੰਤਾ ਜਗ ਨੂੰ ਮਰ ਪੀਣ ਨੂੰ ਜਾਣੀ ਕੋਏ ਕੋ ਵੀ ਹੋਏ ਜਿਹੜੇ ਵਿਸਰੇ ਤੇ ਚਿੱਤ ਮਰ ਪੀਣਾ ਸਕੇ ਮੂਲ ਉਹ ਮਰ ਵੀ ਰੋ ਸਕੇ ਜਿਹੜੀ ਬਹੁਤ ਨਾਦਾ ਉਹ ਬਹੁਤ ਸਮਝਾਂਦੇ ਜੇ ਮਨ ਮਰੀਦਾ ਉਹ ਨਾ ਵੀ ਲੌਤ ਬੁਲੁਣਾ ਪਿਆ ਬਰੇ ਵੀ ਬੁਲੁਣਾ ਪਿਆ ਗੁਰੂ ਦਾ ਪੈਜੰਦਾ ਰਾਮ ਤੇ ਜੂ ਤਸਕਰ ਉਪਰ ਸੂਈ ਇਹਨੇ ਵੀ ਉਹ ਕੋਈ ਬੰਦੇ ਤੇ ਐ ਸਮਝ ਲੋ ਜੀ ਵੀ ਉਹ ਫਾਤੀ ਤੇ ਲੜਖਾਇਆ ਹੁੰਦਾ ਕੋਈ ਨਹੀਂ ਹੈ ਕੋਈ ਅਮੀ ਨਹੀਂ ਪਰਦਾ ਕੋਈ ਨਹੀਂ ਹੁਣ ਇਹ ਲਉਦਾ ਕੋਈ ਜਵਾਬ ਦੇਣ ਦਾ ਆਪਣਾ ਮੂਹਰੇ ਛੜਤਾ ਘਰ ਦਾ ਹੀ ਛੜਤਾ ਜੀਦੇ ਉਹਦੇ ਘੱਟਲ ਪੀਸਾ ਸੀ ਕੋਈ ਜਮਤ ਬਿਮਾਰੀ ਲੈ ਸੀ ਉਹ ਤਾਂ ਛੱਡੀ ਫਿਰਦਾ ਤਸਕਰ ਸੂਰੀ ਤੋਂ ਕੋਮ ਚਲਾਵੇ ਉਹ ਤਸਕਰ ਸੂਰੀ ਤੇ ਜਾਂ ਜਦੋਂ ਜੱਜ ਨੂੰ ਤੋਰੀ ਤੇ ਚੜਿਆ ਵੀ ਦੋ ਤਸਕਰਾਂ ਨੂੰ ਚੜਿਆ ਸੀ ਦਸਣ ਨੂੰ ਵੀ ਇਹ ਬਰਾਬਰੀ ਹੀ ਆ ਤਿੰਨੇ ਜੀਸਸ ਤੇ ਤਾਂ 12 ਚਲੇ ਸੀ 12 ਗੁੱਕਰ ਗਏ ਸੀ ਅਸੀਂ ਨਾਲ ਜਿਹੜੇ ਦੋ ਚੋਰ ਸੀ ਉਹ ਕਹਿੰਦੇ ਸੀ ਜੀਸਸ ਨੂੰ ਵੀ ਅਸੀਂ ਤਾਂ ਚਲ ਮੰਨਿਆ ਸੂਲੀ ਤੇ ਚੜਨਾ ਸੀ ਝੂਠੇ ਸੀ ਤੈਨੂੰ ਤਾਂ ਨਹੀਂ ਸੀ ਚੜਨਾ ਚਾਹੀਦਾ ਤੂੰ ਸੱਚ ਬੋਲਦਾ ਸੀ ਅਸੀਂ ਤਾਂ ਚੋਰ ਸੀਗੇ ਇਸ਼ਾਰਾ ਕਿਤੇ ਉਧਰ ਨੂੰ ਤਾਂ ਨਹੀਂ ਕੀਤਾ ਅੱਜ ਅਗਵੇਜਾਂ ਦਾ ਕਰੈਕਟਰ ਐਸਾ ਬੈੜਾ ਲੁੰਦਾ ਜਾਏਗਾ ਸਭ ਤੋਂ ਬੈੜਾ ਕਰੈਕਟਰ ਅਗਵੇਜਾਂ ਦਾ ਸਮਾਜਿਕ ਸਾਡੇ ਨਾਲੋਂ ਵੀ ਮਾੜਾ ਸਮਾਜਿਕ ਤੌਰ ਤੇ ਗੁਰਦਾ ਕੋਰਸ ਬਾਜ ਹੈ ਸਾਡਾ ਛਲ ਬੇਸ਼ਰਮੀ ਜਿਹੜੀ ਗੱਲ ਹੈ ਉਹ ਠੀਕ ਹੈ ਹਾਂ ਉਹਦੇ ਵਿੱਚ ਤਾਂ ਮਾੜੀ ਐ ਪਰ ਹੁਣ ਕਹੋ ਫਿਰ ਸੱਚੇ ਵੀ ਹੈ ਸਭ ਤੋਂ ਪਹਿਲੀ ਇਹ ਗੱਲ ਹੁਣ ਜੇ ਬੱਚਿਆਂ ਨੂੰ ਅਸੀਂ ਸਕੂਲ ਭੇਜਦੇ ਹਾਂ ਪੜ੍ਹਨ ਤਿਆਰ ਕਰਕੇ ਭੇਜਦੇ ਡਰੈਸ ਪਾ ਕੇ ਭੇਜਦੇ ਅੰਗੇ ਭੇਜਦੇ ਪੜ੍ਹਨਗੇ ਉਹ ਉਹਦਾ ਇਤਹਾਸ ਦੀ ਗੱਲ ਐ ਡਰੈਸ ਦਾ ਪਹਿਲੀ ਗੱਲ ਐ ਬੰਦੇ ਬੰਨੇ ਪੇਟੀ ਜਾਨ 17 ਸਾਲੀ ਜਾਂਸੀ ਤੁਹਾਨੂੰ ਕੋਈ ਇਹ ਵੀ ਕਹੂੰ ਮੇਰੇ ਵਰਗਾ ਉਹ ਲੋਕ ਜਿਆਦਾ ਬੇਵੋਖਰੇ ਵੇਲੇ ਬੰਦੀ ਆਜ਼ਾਦੀ ਦੇ ਹੱਥ ਦੇ ਲੋਕ ਨੇ ਉਹ ਤਸਕਰ ਦੇ ਸਾਰੇ ਹੀ ਉਹ ਖੋਤਾ ਕਰ ਤਸਕਰਾਂ ਨੇ ਵੀ ਕਈ ਕਰੈਕਟਰ ਹੁੰਦੇ ਨੂੰ ਬਣ ਦਿੰਦਾ ਸੀ ਪਰ ਅਫਸਰ ਦਾ ਅਲਜ਼ਾਂ ਉਹਦੇ ਤੇ ਬਾਕਾਇਦਾ ਲੱਗਿਆ ਰਹੇ ਭਲਾ ਆਦਮੀ ਸੀ ਕਿੰਨਾ ਸੱਭਿਆਰੇ ਰਹਿਣਾ ਸੀ ਆਪ ਉਹ ਜੇ ਸੀ ਆਪ ਤਸਰੀ ਦਾ ਦੀ ਗਰੀਬਾਂ ਨੂੰ ਬਣ ਦਿੰਦਾ ਸੀ ਪਟਾਖਰ ਫਿਰ ਵੀ ਸੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਸੁਖ ਹੈ ਜੁੜਾ ਆ ਉਹ ਪ੍ਰਭ ਦੇ ਨਾਲ ਰਸਨ ਦਾ ਵਕਤੀ ਹੈ ਉਹ ਪ੍ਰਗਟ ਰੂਪ ਚ ਹੈ ਦੇਖੋ ਜਿਵੇਂ ਇਹਨਾਂ ਨੇ ਗ੍ਰੰਥ ਰੱਖ ਲਿਆ ਗੁਰੂ ਰੱਖ ਲਿਆ ਨਾ ਸੁਖ ਨਿਧਾਨ ਅਸੀਂ ਪ੍ਰੈਕਟੀਕਲ ਜੀਜ ਰੱਖ ਲਈ ਜੇ ਤਾਂ ਉਹ ਤੋਂ ਸੁਖ ਨਾ ਦਾਨ ਨਹੀਂ ਵਰਦਾ ਉਹ ਚਉ ਛਕੇ ਤੋਂ ਫਿਰ ਨੇ ਸੁਖ ਨੂੰ ਹਾਂਜੀ ਦੁੱਖਾਂ ਸੁਖਾਂ ਦਾ ਕਰੋ ਨਿਤ ਪਾਣ ਕਿਤੇ ਮੱਤ ਮੋੜਨ ਕਿਹੜੇ ਰੰਗ ਗੂੜੇ ਜਿਹੜੇ ਮੋੜ ਮੱਤਾ ਬਿੜ ਜਾਂਦੇ ਜੇ ਜਾਦੇ ਗੱਲਾਂ ਨਾ ਬੋਦੀ ਹੋੜ ਸ਼ਿਰੂ ਫਟਾ ਜਵੇ ਉਹ ਬਿਲੂ ਕਰ ਲਵੇ ਜੋ ਜੀ ਭక్తి ਚਲਿਆ ਆਦਿਕਮੇ ਕਰਕੇ ਦੇਖੋ ਸੁਖ નિਦਾਨ ਪ੍ਰਭ ਏਕ ਹੈ ਅਬਨਾਸੀ ਸੁਣੀ ਪ੍ਰਭ ਗੁਣ ਹੈ ਉਹ ਸਤਵ ਗੁਣ ਮਾਤੁਰੂਪਾ ਸਤਵ ਗੁਣ ਤਾਂ ਮਾਇਆ ਦਾ ਹੁੰਦਾ ਹੈ ਬਦੀ ਰਾਇਦਾ ਸਤਿਗੁਰੂਪ ਹੈ ਇਹ ਸਤਿਗੁਰੂ ਵਾਇਜ ਵੀ ਤੇ ਗੁਰ ਨੇ ਜੀ ਤੋ ਮੰਨਿਆ ਸਿਰਫ ਸੇ ਭਗਤਾਂ ਨਾਲ ਗੋਲਾਂਕ ਨੇ ਚਰਚਾ ਕੀਤੀ ਹੈ ਸ਼ਿਵ ਜੀ ਦਾ ਸੁੱਖਾ ਗੱਲ ਦੀ ਗਹਿਰਾਈ ਤੱਕ ਵਿਚਾਰ ਕਰਦੀ ਚਾਹੀਦੀ ਜਦੋਂ ਵੀ ਤੁਹਾਨੂੰ ਪੜਦੇ ਆ ਧਰਮ ਦੇ ਹਰੇ ਚੈਪਟਰ ਤੇ ਹਰੇ ਗੱਲ ਤੇ ਵਿਚਾਰ ਕਰਦੀ ਚਾਹੀਦੀ ਇਹ ਸੁੱਖਾ ਕਿਉਂ ਆ ਗਿਆ ਕਿਉਂ ਆ ਗਿਆ ਇਹਨੇ ਬਾਅਦ ਸਾਰੇ ਕਿਉਂ ਹੈ ਸਤ ਕਰਦੇ ਨੇ ਤਾਂ ਫਿਰ ਕੋਈ ਚੱਲ ਰਿਹਾ ਤਰਮਿਕ ਆਪਣੇ ਆਪ ਚ ਪੜਾਈ ਹੈ ਵਿਸ਼ਾ ਹੈ ਕੋਈ ਤਾਂ ਕਰਦਾ ਵਿਰੋਧ ਇਸ ਦਾ ਵਿਰੋਧ ਕੌਣ ਕਰ ਕੇ ਪ ਲੰਗ ਜਿਹਨ ਨੂੰ ਪਤਾ ਨਹੀਂ ਤਰਮਿਕ ਹੁੰਦਾ ਉਹ ਤਾਂ ਸਾਹ ਤੋਂ ਚੜਦੇ ਨੇ ਤਰਮ ਦੇ ਰਾਏ ਨਹੀਂ ਪਏ ਹੋ ਤੋਂ ਪਰ ਉਹ ਤਾਂ ਉਹ ਸਿਗਰਟ ਵਾਂਗੂ ਪੀਂਦੇ ਹੁੰਦੇ ਸੀ ਤੇ ਬਾਕੀ ਮਹਾਨ ਸਿੰਘ ਕੋਟ ਕੇ ਪੀਂਦੀ ਹੈ ਤੇ ਫਰਕ ਹੈ ਕਿ ਚੀਜ਼ਾਂ ਉਹ ਭੰਗ ਹੈ ਉਹ ਸੁੱਖਾ ਉਹ ਤਾਂ ਮਨ ਨੂੰ ਭੰਗ ਕਰਦੀ ਉਹਦਾ ਉਹ ਕੋਹਰਨਾ ਜਾਂ ਹੁੰਦਾ ਉਸ ਤੇ ਉਹ ਲਾਗੇ ਵੀ ਤੇ ਨੀ ਉਹ ਮਨ ਭੰਗ ਤੁਹਾਲ ਹੁੰਦਾ ਇਹ ਮਨ ਨੂੰ ਇੱਕ ਕਰਦਾ ਮਨ ਨੂੰ ਜੇ ਬਿਨਾ ਗਿਆਨ ਦੇ ਜ਼ਰਦ ਤੇ ਫਿਰ ਕਿਵੇਂ ਹੋ ਸਕਦਾ ਫਿਰ ਤਾਂ ਗੁਰਦੀ ਤਾਂ ਲੋੜੇ ਨਹੀਂ ਲੋ ਆ ਜਦੋਂ ਦਾਸਤਰੀ ਟੀਕਾ ਲਾ ਕੇ ਵਾਂਗੇ ਕਰਦੇ ਜਦੋਂ ਟੀਕੇ ਦਾ ਸਰ ਗਿਆ ਫੇਰ ਟੁੱਟ ਜਾਂਦਾ ਕਰਦੇ ਤਾਂ ਹਾਂਜੀ ਉਹਨਾ ਜਰ ਜਨਾ ਚਲੇ ਕਹ ਉਹ ਮਾ ਜੀ ਰੂਹ ਬੁਝੇ ਗੁਰਬਾਨੀ ਸੁਣਾਈ ਉਹਦੇ ਖਾਂਦੇ ਚ ਜਾਦਾ ਬਹਿੰਦੀ ਹੈ ਧਿਆਨ ਦੀ ਉਹ ਪਾਸੇ ਜਾਂਦਾ ਅੱਛਾ ਉਹ ਜੇ ਉਹ ਇੱਕ ਕਰਕੇ ਧਿਆਨ ਦੂਏ ਪਾਸੇ ਤੋਂ ਖਿੱਚ ਕੇ ਇੱਕ ਪਾਸੇ ਰੱਖ ਕੇ ਫਿਰ ਉਹ ਗੁਰਬਾਨੀ ਪੜਾਈਏ ਫਿਰ ਪੜੂਏ ਉਹਦਾ ਤਸਾਦਨ ਆਪਾਂ ਤਸਾਦਨ ਵੀ ਤਾਂ ਚਾਹੀਦਾ ਜਿੱਤੀ ਆਪਾਂ ਬੋਲਦੇ ਹਾਂ ਖਾਦਨ ਪ੍ਰਭਰ ਅਪਣੇ ਦਿੱਤਾ ਪਰ ਜਿੱਤੀ ਆਪਾਂ ਲਈ ਦਿੱਤੀ ਠੀਕ ਹੈ ਕਹਿੰਦਾ ਮਤਲਬ ਜਿਹੜਾ ਸੁਖ ਨਿਦਾਨ ਪ੍ਰਭ ਹੈ ਜੇ ਉਹਦੇ ਨਾਲ ਮਿਲਣਾ ਹੋਵੇ ਤੇ ਜੇ ਆਪਾਂ ਸੁੱਖੇ ਦਾ ਸੇਵਨ ਸਹਾਈ ਹੁੰਦਾ ਸਹਾਈ ਸਟੇਜ ਦਾ ਲੋੜ ਨਹੀਂ ਹੁਣ ਮੈਂ ਸੁੱਖਾ ਪਛੰਦਾ ਬਜੂਰ ਕਰਦਾ ਉਦਿਓਗਮ ਕਰਦੇ ਅਰਜੰਦੀ ਹੈ ਜੇ ਉਹ ਆ ਰਿਹਾ ਜਦੋਂ ਸਹਾਈ ਹੋ ਰਿਹਾ ਜਾਂ ਪੈਣ हां जी अपने ਘਰੋਂ ਬਾਹਰ ਖੋਲਦੇ ਲਈ ਉਹ ਤਾਂ ਜਨ ਜਨ ਲੋੜ ਆਉਂਦੀ ਵਸਲਾ ਠੀਕ ਹੈ ਜੀ ਹਾਂ ਜੀ ਸੁਖ ਨਿਧਾਨ ਪ੍ਰਭ ਇੱਕ ਹੈ ਅਬਨਾਸੀ ਸੁਣਿਆ ਅਬਨਾਸੀ ਸੁਣਿਆ ਉਹ ਸੁਣਿਆ ਅਬਨਾਸੀ ਹੈ ਅਬਨਾਸੀ ਵੀ ਹੈ ਜਲ ਥਲ ਮਹੀਲ ਪੂਰਿਆ ਘਟ ਘਟ ਹਰਪਣਿਆ काट काट तेते बोल के करदा कर हर वर्तया किन भाव भी ये हर भी हो ही क्योंकि पहला कह ऐसी सुख निदान प्रभु एक है इथे किया कट कर हर पणिया ਉਹ ਨੀਚ ਸਾਬ ਇੱਕ ਸਮਾਨ ਕੀਟ ਹਸਤੀ ਬਣਿਆ ਕੀ ਹਸਤੀ ਬਣਿਆ ਜਿਹੜਾ ਕੀੜਾ ਸੀਗਾ ਹਾਤੀ ਬਣ ਗਿਆ ਉਹੀ ਆਤਮਾ ਹੁੰਦੀ ਆ ਤੁਹਾਨੂੰ ਕੋਈ ਫਰਕ ਨਹੀਂ ਪਿਆ ਅੱਛਾ ਜੀ ਇੱਕ ਸਮਾਨ ਦੇ ਹੋਏ ਕਿ ਆ ਬੜੀ ਜੋ ਹੈਗੀ ਹੈ ਜੂਨੀ ਉਹਦੇ ਵਿੱਚ ਇੱਕ ਸਮਾਨ ਹੀ ਹੈ ਕੋਈ ਫਰਕ ਕੋਈ ਫਰਕ ਨਹੀਂ ਹੈ ਠੀਕ ਹੈ ਜੀ ਫਦੀਰ ਦੇ ਨਾਲ ਸਖਾਸਤ ਬੰਧ ਪੋ ਸਭ ਤਿਸਤੇ ਜਣਿਆ ਜੀਤ ਸਦਾ ਸਤਵਾਤ ਬੰਦ ਕੋ ਸਭ ਤੇ ਚੈ ਜੜਿਆ ਉਹਦਾ ਹੀ ਪੈਦਾ ਕੀਤਾ ਹੋਇਆ ਜੋਤ ਨੇ ਪੈਦਾ ਕੀਤਾ ਜੋਤ ਤੇ ਬਿਨਾ ਦਾ ਕੋਈ ਚੀਜ਼ ਬਣੇ ਨਹੀਂ ਸਕਦੀ ਜੰਦਵੇ ਹੋ ਸਕਦਾ ਤੁਸ ਨਾਨਕ ਦੇਵੈ ਜਿਸ ਨਾਮ ਜ਼ਰੂਰ ਹੈ ਜਿਹਦੇ ਖੁਦ ਰੁੱਤ ਨੂੰ ਦੇਜਵੇ ਤੁਸ ਖੁਸ਼ ਹੋ ਜਾ ਜਿਹਦੇ ਪ੍ਰਸੰਧ ਹੋ ਕੇ ਨਾਮ ਦੇ ਦੇਵੇ ਉਹ ਪਾਸ ਹੈ ਉਹ ਹਰ ਦੰਦਾਂ ਦੇ ਵਿੱਚ ਖੇਲਦਾ ਹੈ ਬਾਕੀ ਮਾਇਆ ਚ ਗਹਿਲੀ ਜਾਂਦੇ ਨੇ ਖੇਲਦੇ ਹੋਏ ਨੇ ਮਾਇਆ ਦਾ ਬਹੁਤ ਹੈ ਨੇ ਹਰਾ ਵੀ ਜਿਆ ਵੀ ਹੈ ਲਾਲ ਵੀ ਹੈ ਮਾਤਾ ਮਾਇਆ ਨੂੰ ਦੀਨ ਦਾ ਰੰਗ ਉਹ ਸੱਚ ਦੇ ਰੰਗ ਚ ਖੇਲਦਾ ਬਾਕੀ ਦੂਏ ਝੂਠ ਦੇ ਰੰਗ ਖੇਲਦੇ ਨੇ ਖੇਲਦੇ ਸਾਰੇ ਹੀ ਖੇਲਦੇ ਹੀ ਉਹਨੂੰ ਚੰਗੇ ਲੱਗਦੇ ਨੇ ਉਹ ਵੀ ਚੰਗੇ ਲੱਗਦੇ ਨੇ ਖੇਲਦੇ ਨੇ ਜੋ ਨੇ